ਸੁ ਲੋਕ ਦਿਨ ਦਰਦ ਦੁੱਖ ਭੰਜਨਾ ਕਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਹੇ ਇਹ ਕਟ ਘਟ ਕੇ ਨਾਥ ਅਨਾਥ ਤੂੰ ਦਿਨਾਂ ਦੇ ਦਰਦ ਨੂੰ ਜਿਨ੍ਹਾਂ ਦੇ ਦੁੱਖ ਕਟਣ ਵਾਲਾ ਅਨਾਥ ਉਹਦਾ ਜਿਹ ਜਿਹਦੇ ਉੱਤੇ ਜਿਹਦੀ ਨਾਥ ਕਿਸੇ ਦੇ ਹੱਥ ਜਰੋਂ ਹੋਵੇ ਉਹ ਅਨਾਥ ਹੈ ਨਾਥ ਉਹ ਹੈ ਜਿਹਦੇ ਦੂਰੇ ਦੇ ਨਾਥ ਪਾਈ ਹੋਈ ਹੈ ਦੂਰੇ ਦੇ ਨਾਥ ਪਾਈ ਹੋਈ ਕਰਕੇ ਉਹਨੂੰ ਨਾਥ ਕਹਿੰਦੇ ਆ ਉਹਦੇ ਹੱਥ ਹੈ ਜੀ ਪਾਈ ਹੋਈ ਤਾਂ ਉਹ ਹੈ ਆਪਣੀ ਰੱਤ ਦੀ ਉਹਦੇ ਨਾ ਤੋਂ ਬਿਨਾ ਰੱਤ ਤੋਂ ਬਿਨਾ ਕੋਈ ਨਹੀਂ ਇਨਾ ਗਿਆਨ ਕਰਦਾ ਸਮਝੇ ਤੁਹਾਡਾ ਨਾਮ ਨਾ ਸੀ ਦਾ ਸਾਰੀ ਸੇਟੀ ਉਹਦਾ ਕਬੂਜਾ ਸੀ ਇਸ ਵਿੱਚ ਕੋਣ ਬ੍ਰह्म ਨਹੀਂ ਹੈ ਅਸਲ ਜੀ ਉਹ ਬ੍ਰਹਮ ਦਾਤ ਵੀ ਹੁੰਦਾ ਹੈ ਅਨਾਰਤੀ ਹੁੰਦਾ ਉਹ ਬ੍ਰਹਮਨਾ ਆਧਵੀਆ ਨਾਸਰੀਆ ਕਿਵੇਂ ਹੁਕਮ ਦੇ ਵਿੱਚ ਹੈ ਦਾਤਾ ਅਨਾਧ ਅਨਾਧ ਹੈ ਆਪਣੀ ਨਾਥੀਆਂ ਹੈ ਹੁਕਮ ਪਰ ਉਹ ਆਪਣੀ ਹੁਕਮ ਦੇ ਵਿੱਚ ਹੈ ਕਿਸੇ ਦੇ ਹੁਕਮ ਚ ਨਹੀਂ ਉਹ ਹੁਕਮ ਨਹੀਂ ਹੈ ਉਹਦੇ ਵਾਸਤੇ ਉਹਦੇ ਵਾਸਤੇ ਉਹ ਰਜਾ ਹੈ ਪਰ ਜਿਹੜੀ ਰਜਾ ਕਹਿੰਦੇ ਆ ਉਹ ਜ ਆਪਣੇ ਵਾਸਤੇ ਜਿਹੜਾ ਹੁਕਮ ਆ ਉਹਦੇ ਵਾਸਤੇ ਰਜਾਈ ਉਹਦੇ ਵਾਸਤੇ ਨਹੀਂ ਹੁਕਮ ਆ ਕੋਈ ਹੁਕਮ ਆਂਦਰ ਸਭ ਕੋ ਜਦ ਕਹਿੰਦੇ ਆ ਸੀ ਤੋਂ ਦਿਆਂ ਹੁਕਮ ਇਸ ਤਰ੍ਹਾਂ ਪਰ ਤਾਂ ਹੁਕਮ ਜੇ ਹੁਕਮ ਦੇ ਵਿੱਚ ਤੇ ਹਾਲੀਵੁੱਡ ਸਾਰੇ ਤਾਂ ਉਹਨਾਂ ਦਾ ਹੁਕਮ ਆਪਣਾ ਹੀ ਬਣਾਇਆ ਹੋਇਆ ਆਪਣੀ ਮਰਜ਼ੀ ਦਾ ਹੁਕਮ ਹੈ ਕੋ ਜਬਰਦਸਤੀ ਉਪਰ ਲਾਗੂ ਨਹੀਂ ਹੁੰਦਾ ਇਹ ਆ ਤੇ ਜਬਰਦਸਤੀ ਹੈ ਉਹਨਾਂ ਵਾਸਤੇ ਹੁਕਮ ਹੈ ਜਿਹੜੇ ਹੈ ਜਿਨ੍ਹਾਂ ਜਿਨ੍ਹਾਂ ਦਾ ਹੁਕਮ ਆਇਆ ਜਿਨ੍ਹਾਂ ਤੇ ਬੰਨ ਪਹੁੰਚਦਾ ਹੁਕਮ ਹੈ ਜਿਨ੍ਹਾਂ ਨੂੰ ਪਾਣਾ ਮਿੱਠਾ ਲੱਗਦਾ ਉਹਨਾਂ ਵਾਸਤੇ ਹੁਕਮ ਨਹੀਂ ਉਹਨਾਂ ਵਾਸਤੇ ਜਿੰਫਟ ਹੈ ਨਾਮਦਾਰ ਹੋਣਗੇ ਉਹਨਾਂ ਦਾ ਜੀਵਨ ਹੈ ਉਹ ਖੁਸ਼ ਜੀਦਾ ਜਦ ਤੱਕ ਉਹ ਚੱਲਣਾ ਜਦ ਤੱਕ ਜੀਵਨਾਮਾ ਰਚਦਾ ਜਦ ਤੱਕ ਪਰਕਾਰ ਚੱਲਦਾ ਜੀਵਨ ਤਾਂ ਫਿਰ ਵੀ ਚੱਲਦਾ ਰਹਿੰਦਾ ਕੋਈ ਇਥੇ ਬਰਕ ਬੈਗਾ ਸੀ ਚੱਲਦਾ ਜੀਵਨ ਬਾਅਦ ਵੀ ਚੱਲਦਾ ਰਹਿੰਦਾ ਜੀਵਨ ਦਾ ਹੋਂਦ ਕੋਈ ਸਮਝ ਨਹੀਂ ਜੀਵਨ ਤਾਂ ਇੱਛਾ ਇਹ ਜਿਹੜਾ ਉਹਨਾਂ ਦਾ ਵੀ ਜੀਵਨ ਹੈ ਦੁਖਦਾਈ ਹੈ ਸੁਖਦਾਈ ਨਹੀਂ ਹੈ ਨਹੀਂ ਦੁਖਦਾਈ ਹੈ ਉਹਨਾਂ ਵਾਸਤੇ ਦੁਖਦਾਈ ਹੈ ਸਾਡੇ ਵਾਸਤੇ ਸੁਖਦਾਈ ਜਿੰਨਾ ਜੇ ਰਚਨਾ ਚੱਲ ਰਹੀ ਹੈ ਹੋ ਸੰਕੀਤ ਜੀ ਨੂੰ ਆਏ ਹਨ ਸੌਖਾ ਨਹੀਂ ਹੈ ਹੋ ਮੇਰੇ ਸਿਸਟਮ ਚ ਸੌਖਾ ਨਹੀਂ ਹੈ ਇੰਨਾ ਟੱਬਰ ਦੀ ਜ਼ਿੰਮੇਵਾਰੀ ਨਹੀਂ ਬੈਠੇ ਹੋਣਾ ਚਾਹੀ ਬੰਦੇ ਕਿੰਨੇ ਹੁੰਦੇ ਇੱਕ ਇੱਥੇ ਵੀ ਸਰਕਾਰ ਚੱਲਦੀ ਹੈ ਕੰਨੇ ਆਦਮੀ ਚਲਾਉਂਦੇ ਨੇ ਆਪਾਂ ਤਾਂ ਹੋਛਾ ਘੱਟਣ ਵਾਲੇ ਸੀ ਪੁੱਛਿਆ ਤਾਂ ਉਹਨੂੰ ਜਾਣੀ ਜਿਹੜੇ ਬੁਰਦਾਰ ਵੀ ਨੇ ਉਹਨੂੰ ਪੁੱਛਿਆ ਜਾਣੀ ਜਿਹੜੇ ਉਹਨਾਂ ਬਾਗੀ ਨੇ ਮਨੁੱਖ ਸਾਰਿਆਂ ਦੇ ਉੱਤੇ ਹਕਮ ਰੂਲਣਾ ਅਬ ਨੁਕਸਾਨ ਹੋਣਾ ਲੱਭੀ ਕਰਨਾ ਉਹਰੇ ਦਾ ਭਲਾ ਹੀ ਕਰ ਭਲਾ ਫਿਰ ਗੁਲਾ ਫਿਰ ਵੀ ਨਹੀਂ ਕਹਿਦਾ ਸਰਦੋ ਫਲਾਤਾ ਕੋਈ ਬੁਰਾ ਕਰਦਾ ਨਹੀਂ ਹੁੰਦਾ ਹੋ ਹੀ ਨਹੀਂ ਸਕਦਾ ਪੁਰ ਉਸਤੇ ਹੋਏ ਨਹੀਂ ਕੁਛ ਬੁਰਾ ਬੁਰਾ ਕਦੇ ਹੋਣਾ ਤੇ ਜਿੰਨਾ ਸਾ ਬੁਰਾ ਇੰਨੇ ਆਇਆ ਬੁਰਾ ਬੁੱਧਦੇ ਆ ਅਸੀਂ ਔਰ ਇਹ ਕਹੋ ਕਿ ਕੁਛ ਕਰਾਓ ਹੋਰ ਕਿ ਨਾ ਕੁਛ ਕੀਤਾ ਦੀ ਫਿਰ ਉਹਦਾ ਕੀਤੇ ਨੂੰ ਬੁਰਾ ਮੰਨ ਲੋ ਇਹ ਸਮਝੀਏ ਇੱਕ ਪਾਸੇ ਤਾਂ ਜਿਹੜਾ ਤਾਂ ਜਾਗ ਪਿਆ ਉਹ ਤਾਂ ਕਹਿੰਦਾ ਉਸੇ ਹੋਏ ਤੁਸੀਂ ਕੁਝ ਕੋਲ ਉਹ ਤੇ ਬੁਰਾ ਨਹੀਂ ਕੁਝ ਹੋ ਸਕਦਾ ਉਡੀ ਔਲਾਦ ਤੇ ਜਿਵੇਂ ਔਲਾਦ ਬਾਰੇ ਔਲਾਦ ਚਾਹੇ ਬੁਰਾ ਕਹੇ ਵਾਫੂ ਨਹੀਂ ਕਿ ਬੁਰਾ ਕਰਦਾ ਪਰ ਉਹ ਬੁਰਾ ਨਹੀਂ ਕਰਦਾ ਜੋ ਬੁਰਾ ਹੁੰਦਾ ਹੈ ਜਿਹੜੀ ਜ਼ਖਜ ਬੁਰਾ ਹੋ ਸਕਦਾ ਮੈਨੂੰ ਕੋਈ ਗੱਲ ਨਹੀਂ ਲੱਗੇ ਕੰਦਾ ਉਹ ਕਟਾ ਕੀ ਬੁਰਾ ਜੋ ਕਟਾ ਕੀ ਬੁਰਾ ਵੇਰੇ ਮੰਨਪੋ ਦੀ ਕਵਿਤੀ ਕਰਦੇ ਮੇਰੀ ਵੀ ਬੰਦੇ ਤੇਰੀ ਭਾਈ ਬੰਨਣ ਵਾਲੀ ਨਹੀਂ ਹੋਣੀ ਢਾਲ ਹੀ ਬੰਦੇ ਜਿਹੜੀ ਬੰਨਣ ਵਾਲੀ ਉਹ ਤਾਂ ਬੰਦੇ ਕਿਉਂਕਿ ਆਪਣਾ ਜਿਹੜਾ ਕਵੀ ਹੈ ਉਹ ਦੂਜੇ ਦਾ ਕੋਈ ਜਦਕੇ ਆਪਣਾ ਲੈ ਕਰ ਬਾਦ ਨੂੰ ਸਿਰ ਜਮਾ ਕਰ ਦੇਖਦਾ ਜਦ ਫਿਰ ਬਾਹਰਲੇ ਕਵੀ ਦਾ ਪਤਾ ਹੀ ਨਹੀਂ ਕਿਸੇ ਕੋਈ ਹੈ ਕਰੀ ਆਪਣਾ ਨਾਮ ਹੀ ਕੀ ਹੈ ਆਪਾਂ ਨੇ ਆਪਣਾ ਘਰ ਕਮਰਾ ਸਾਫ ਕਰਨਾ ਕਿ ਦੁਨੀਆਂ ਦੇ ਕਰਨਾ ਇਹ ਆਪਣਾ ਸਾਹ ਹੈ ਉਹਦੀ ਸੋਭਾ ਬੜੀ ਦੇ ਸਾਇੰਸ ਤੇ ਪ੍ਰੀਜ ਕਰੀ ਜਾਈਏ ਨਿਗਾਰਾ ਰੱਖੀ ਆਪਣੇ ਨੇ ਰੱਖੀ ਨਾ ਘਰ ਤੇ ਇਹ ਤਾਂ ਅਕਲੂਤੀ ਦੀ ਗੱਲ ਜੀ ਹੋਹੀ ਰਿਹਾ ਹੋਹੀ ਹੀ ਤੇ ਕੋਈ ਤੁਰੇ ਬੀਨ ਦਰਦ ਦੁੱਖ ਭੰਜਣਾ ਹਰ ਘਰ ਵਿੱਚਾਂ ਤੂੰ ਨਾ ਤਮੀਆ ਆਣਾ ਤਮੀਆ ਨਥ ਉਲਦੀ ਹੈ ਨਾ ਸਤਾਂ ਪਾਈਦੀ ਹੈ ਬਾਗੀ ਦੇ ਜੇ ਸੰਗੂ ਕੋੜੇ ਤੌ ਜੇ ਪ੍ਰੋਸਾ ਹੋਵੇ ਵੀ ਕੋੜੇ ਦੇ ਸਾਡੇ ਇਸ਼ਾਰੇ ਨਾਲ ਚੱਲਣਾ ਉਹਦੇ ਨਾਲ ਨਹੀਂ ਪਾਈਦੀ ਜੇ ਘਰ ਪੜੀ और जल्दी भी है जे बड़दा दा सानू भरोसा होवे कि जिधर वे सी कहेंगे मुड़ी की जिद्द है? कीलोड़ दे 15 ही ताही मिलदी हाथी बोलते चलते चाले आवाज दंदा हाथी जरूर चलते आदमी ने आवाज आती समझ दे कब भी करण में हाथी दे लोग ਕੜਾਮਗਾਰਾ ਹੋਰ ਕਾਫੀ ਕੰਮ ਕਰ ਦਿੰਦਾ ਨਹੀਂ ਕੋਈ ਜਸ ਸ਼ਕਤ ਦਾ ਨਾਮ ਜਿਹੜਾ ਇਹ ਕੰਮ ਕਰਾਉਂਦੇ ਸ਼ਕਤ ਦੇ ਕੰਮ ਕਰਦੇ ਸ਼ਕਤ ਬੰਦਾ ਇਹ ਕਰਕੇ ਉਹ ਦੇ ਕੋਲ ਸਮਝ ਹੈ ਬੁੱਧੀ ਹੈ ਅਰ ਬੁੱਧੀ ਨਾਲ ਕਾਬੂ ਬਣਦਾ ਕਰ ਲੈਦਾ ਜੇ ਨਾ ਕਰਦਾ ਕੋਈ ਹੋਰ ਵੀ ਜਿੱਥੇ ਉਹ ਹੜਦਾ ਉਥੇ ਰੱਖਿਆ ਹੋਇਆ ਹੈ ਠੀਕ ਹੈ ਸਰ ਜੇ ਫਿਰ ਨਹੀਂ ਮੰਨਦਾ ਫਿਰ ਅੰਕਸ ਵੇਨਦਾ ਉਹਨਾਂ ਕੋਲ ਵੀ ਨਾ ਪਿਆ ਅਗਜੋੜਾ ਆਉਂਦਾ ਉਹ ਨਾ ਥੈ ਕਿਉਂ ਉਹ ਵੀ ਨਾ ਥਾ ਸਾਡੇ ਅੰਕਸ ਆ ਹੈ ਦੀਸ ਤੇ ਗੁਰਮਖਦੇ ਸਿਖੁਰ ਸਿਖਦੇ ਅੰਕਸ ਤਾਂ ਹੈ ਕਿ ਅੰਕਸ ਹੈ ਉਹ ਚੀਜ਼ ਹੈ ਅੰਕਸ ਹੈ ਨਾ ਥੀ ਨੱਥ ਦਾ ਹਟਾ ਮੈਂ ਤੁਹਾਨੂੰ ਸੋਧਣੀ ਹੈ ਜੇ ਕੰਮ ਕਰਦਾ ਜਦੋਂ ਬਾਡੀ ਹੋਵੇ ਅੰਕਾ ਤੇ ਘੱਟੀ ਕਰ ਬੜਈਆ ਨਾ ਸਾਡਾ ਇਹ ਹੂੰ ਤਾਂ ਤਾਂ ਨੂੰ ਘੁਜੇ ਕਰ ਦਿੱਕਰੂਗਾ ਦੇ ਬੰਦੂਗਾ ਸੋਹਦੇ ਬਾਹਰ ਜਾਊਗਾ ਤਹਈਆ ਨਾ ਚਲਾ ਜਾਵਾਂ ਇਸੇ ਤਰ੍ਹਾਂ ਸਮਝਾ ਜਿੱਤੇ ਵੀ ਗਲਤੀ ਹੋ ਗਈ ਅਕਲ ਫੋ ਜਾਣਾ ਫੇ ਜਮਣ ਗਲਦਾ ਉੜਦੇ ਮਨ ਦੀ ਲੋਟ ਪਈ ਜਿੱਤੇ ਗਲਤੀ ਹੋਈ ਉੱਤੇ ਅੰਕਲ ਬਣ ਉਹ ਅੰਕਲ ਫਿਰ ਨਾ ਜਾਣੂ ਕਰਮ ਦਾ ਜੇ ਅੰਕਲ ਤੇ ਹਟ ਜਾਂਦਾ ਸੇ ਸੱਤਿਆ ਉਸ ਨੂੰ ਬਿਲਕੁਲ ਸਹੀ ਹੋ ਗਿਆ ਤੇ ਦੋ ਬਰਾਸ ਮਿਲ ਗਏ ਆਕਾ ਗਈ ਉਹ ਪੈ ਚੱਕਿਆ ਗਲਤ ਸਾਰਾ ਉਹ ਤਾਂ ਪੈ ਉਹ ਚੱਕਿਆ ਮਨ ਮੰਨ ਗਿਆ ਜਦੋਂ ਉਹ ਅਥੀ ਘਤੀ ਕਰਦਾ ਜਾਂ ਮੁਟ ਗਈ ਅਥੀ ਵੀ ਲਾਪਰਵਾਹੀ ਕਰਦਾ ਹੈ ਲਾਪਰਵਾਹੀ ਕਰਦਾ ਫੇਜਾਦਾ ਉਹਦੇ ਕਹੇ ਜਿੱਦੀ ਘਰਾਵੋ ਠੀਕ ਹੋ ਗਈ ਜੰਤੀ ਜੇ ਹਾਂਜੀ ਸਰਨ ਤੁਮਾਰੀ ਆਇਓ नानक के प्रभु जहां गर्भ पैदा होने पर प्रहार हो जाता है उस गर्भ पर हारी शरण तुम्हारी आयो शरण तुम्हारी आयो नानक ना के प्रभु साथ नानक के प्रभु मार्गवे नाल है रोट स सूरज तुप दे नाल है रोट स टप दी शरण गई है सूरज बालू इकट्ठा कर दे टप भजली बाहर नु सूर्य तो बहुत दूर हो गई हैल की थैल बाहर जाके इकट्ठी हो के वापस आज बे सूरज बन जाया कर फिर किया ਉਜਿਆਵ ਅਗਰ એનર્ਜੀ ਖਾਰਜ ਹੋ ਗਈ ਸੂਰਜ ਚ ਉਹ ਤਪਦਰੂਪ ਚਲੇ ਗਈ ਉਹਨਾ ਸੋਲ ਵੀ ਛੋਟਾ ਹੋ ਗਿਆ ਠੱਗ ਗਿਆ ਤਾਂ ਭਾਇਆ ਮਾਇਆ ਇਸ ਤਰ੍ਹਾਂ ਚੇਤਨ ਦੀ ਦੀ ਹੁੰਦੀ ਹੈ ਉਹ ਜਿਹੜੀ એનર્ਜੀ ਕਿਸੇ ਕੋਈ ਵਾਪਸ ਨਹੀਂ ਆ ਸਕਦੀ ਜਿਹੜਾ ਤੇਲ ਜਲ ਗਿਆ ਵਾਪਸ ਤੇਲ ਨਹੀਂ ਬਣਦਾ ਲੇਕਿਨ ਇਹ ਬਣ ਗਿਆ ਹੈ ਬਾਹਰ ਵਾਪਸ ਆ ਜਾਂਦਾ ਉੱਡਾ ਹੀ ਹੋ ਜਾਂਦਾ ਫਿਰ ਮਾਇਆ ਜੋ ਜਿਸ ਦਾ ਬਾਹਰ ਨਹੀਂ ਦਾਲੀ ਕੋ ਹੋ ਨਹੀਂ ਸਾਦੀ ਉੜਿਆ ਨਹੀਂ ਹੋ ਜਾਂਦੀ ਇਹੇ ਹੋਏ ਵਾਲੀ ਹੋ ਜਾਂਦੀ ਬਾਹਰ ਵਾਲੇ ਦਾ ਦਾਲ ਕਰ ਵੀ ਲਵੋ ਤਾਂ ਵੀ ਉੱਗਦੀ ਸਿਕੜੋ